ਜੋ ਲੋਕ ਮਹੱਲਾ ਤੀਜਾ ਗੁਰਮੁਖ ਸੱਚੇ ਭਾਵ ਦੇ ਦਰ ਸੱਚ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਗੁਰਮੁਖ ਸੱਚੇ ਭਾਵ ਦੇ ਜਿਹ ਗੁਰਮੁਖ ਨੇ ਸਾਰੇ ਗੁਰਮੁਖ ਨੇ ਉਹ ਸੱਚੇ ਨੂੰ ਸਾਰੇ ਜੰਮੇ ਲੱਗਦੇ ਨੇ ਜੈ ਜਨੇ ਮਰਜੀ ਹੁਣ ਭਾਵਦੇ ਉਹ ਹੀ ਬਹੁ ਹੈ ਗੁਰਮੁਖ ਭਾਉਂਦੇ ਨੇ ਦੂਜੇ ਦੀ ਭਾਉਂਦੇ ਜੇਵਾ ਸਭ ਦਿਓ ਕਰਦਾ ਉਹ ਆਪਣੀ ਡਿਊਟੀ ਕਰਦਾ ਹੈ ਅੰਤ ਤੱਕ ਸਭ ਨੂੰ ਹੀ ਦਿੰਦਾ ਹੈ ਪਰ ਪੌਣਾ ਦਰ ਸੱਚਾ ਸਚਿਆਰ ਕਿਉਂਕਿ ਸਾਜਨ ਮਨ ਆਨੰਦ ਹੈ ਗੁਰ ਸ਼ਬਦ ਵਿਚਾਰ ਸਾਜਨ ਮਨੀ ਗੁਰ ਕਰਕੇ ਸਾਜਨ ਆਨੰਦ ਹੈ ਗੁਰ ਸ਼ਬਦ ਵਿਚਾਰ ਗੁਰ ਕਾ ਸ਼ਬਦ ਵਿਚਾਰਿਆ ਹੋਇਆ। ਸਮਝ ਹੈ। ਇਸ ਕਰਕੇ ਰੁਦਾ ਸਾਜਿਬ ਠੀਕ ਹੈ ਜੀ। ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਜਾਨਣ ਕੀਆ ਕਰਤਾਰ। ਅੰਤਲ ਸ਼ਬਦ ਵਸਾਇਆ ਜਿਹਦੇ ਅੰਦਰ ਸ਼ਬਦ ਵਿਚਾਲਿਆ ਦੁੱਖ ਕਟਿਆ ਗਿਆ। ਜਾਨਣ ਕੀਆ ਕਰਤਾਰ ਕਰਤਾਰ ਨੂੰ ਜੇ ਅੰਦਰ ਚਾਲੂ ਕਰਤਾ। ਜਿਹਦੇ ਅੰਦਰ ਜਾਨਣਾ ਉੱਤੇ ਦੁੱਖ ਤੇ ਹੈ। ਜੋ ਕਤਾ ਨੇ ਰਹਿ ਜੋ ਕਹਦਾ ਹੁੰਦਾ ਗਿਆਨਤਾ ਜੋ ਇੱਥੇ ਜਿਹੜਾ ਸ਼ਬਦ ਦਾ ਭਾਵ ਹੈ ਇਹ ਗੁਰਬਾਣੀ ਨਾਨਕ ਰਖਣ ਹਾਰਾ ਰੱਖੀ ਆਪਣੀ ਕਿਰਪਾ ਧਾਰ ਆਦੇ ਰਖਣ ਵਾਲਾ ਤਾਲੀ ਦੀ ਹੈ ਅਤਾਂ ਹਾਰਾ ਰੱਖੀ ਆਪਣੀ ਕਿਰਪਾ ਧਾਰ ਰੱਖਣਾ ਰੱਬ ਅੱਤੇ ਰੱਖੂਗਾ ਕਿਰਪਾ ਦ੍ਰਿਸ਼ਟੀ ਕਰੂਗਾ ਫਿਰ ਬਚਾਊਗਾ ਜੇ ਮਨ ਮੰਗਦਾ ਹਾਂਜੀ ਮਹੱਲਾ ਤੀਜਾ ਗੁਰ ਕੀ ਸੇਵਾ ਚੱਕਰੀ ਪੈ ਰਚਕਾਰ ਕਮਾਏ ਜਿਹ ਹੈ ਸੇਵਾ ਤੇ ਹੋ ਹੋਗਾ ਜੇ ਚੱਲੇ ਤੇ ਸੇ ਰਜ਼ਾਈ ਗੁਰ ਕੀ ਸੇਵਾ ਚੱਕਰੀ ਗੁਰ ਕੀ ਸੇਵਾ ਲੱਕਰ ਲੱਗੇ ਚੱਕਦੀ ਜੇ ਚੱਲੇ ਖਸਮਾਂ ਪਾਏ ਖਸਮ ਦੀ ਰਾਜਾ ਚੱਲਣਾ ਚੱਕਰੀ ਹੈ ਐ ਸੇਵਾ ਕਰਦਾ ਮੈਨੂੰ ਆ ਉਹੀ ਕਰਦਾ ਜਿਹਾਂ ਸੇਵਾ ਤੇ ਹੋ ਹੋਵੇ ਜੇ ਚੱਲੇ ਤਿਸੇ ਰਜ਼ਾਈ ਜਿਹਾਂ ਸੇਵਾ ਤੇ ਹੋ ਹੋਵੇ ਸੇਵਾ ਕਰਤਾ ਹੋ ਜਾਈ ਬਣਦਾ ਫਿਰ ਪਹੁੰਚ ਜਾ ਬ ਜੇ ਕਲਾਕ ਸਰ ਜਾਇ ਰਜਾ ਵਿੱਚ ਚੱਲੇ ਤੇ ਦਿਰਪਉ ਦੀ ਸੇਵਾ ਜੋ ਕਰਦਾ ਫਿਰ ਭੈ ਜਪਾ ਸਦਲ ਪਉ ਬਿਟਿਆ ਬੁਰਕ ਕਰਪਾਤੇ ਪੁਰਾਨੀ ਛੁਟਾ ਉਹ ਹੋ ਜਾਈ ਹੋ ਜਾਈਦਾ ਜੇ ਰੱਜ ਕੇ ਕਾਰ ਕਰੇ ਜੇ ਦਿਲ ਲਾ ਕੇ ਕਰੇ ਇੱਕ ਮੰਦੀ ਪਿੱਛੇ ਤੋਂ ਕੇ ਕਰੇ ਨਾਨਕ ਸਭ ਕਿਚ ਆਪ ਹੈ ਅ ਦੂਜੀ ਜਾਏ ਆਪ ਹੈ ਇਹ ਸਭ ਜੀਵ ਉੱਜੀ ਜਗਾਈ ਕੋਈ ਨਹੀਂ ਇਹ ਕਹਨੇ ਚੱਕਰੀ ਕਰਦੀ ਏ ਵਰਗਾ ਹੋ ਜਾਣਾ ਨਹੀਂ ਕਰਦੀ ਫੇਰ ਲਹਿ ਜਾਣ ਜੁੜਨਾ ਨਹੀਂ ਜੁੜਨਾ ਇਹਦੀ ਮਰਜ਼ੀ ਦੇ ਉੱਤੇ ਐ ਚੱਕਰੀ ਹੋ ਕੇ ਕਰਦੀ ਏ ਕਿ ਜਤੋਂ ਹੋ ਕੇ ਕਰਦੀ ਏ ਇਹਦੇ ਸਿਰ ਤੇ ਹੀ ਐ ਮਾਇਆ ਜੀ ਲੱਗਿਆ ਹੋਇਆ ਮਾਇਆ ਚ ਰਹਿ ਜੂਗਾ ਇਹਦੀ ਮਰਜ਼ੀ ਹੈ ਮਾਇਆ ਛੱਡਣੀ ਐ ਕੁਰਕੀ ਸੇਵਾ ਕਰਨੀ ਐ ਚੱਕਰੀ ਕਰਨੀ ਐ ਫੈਸਲੇ ਕਿਹਦੇ ਕਰਦੀ ਹੈ ਸਾਡੀ ਮਰਜ਼ੀ ਠੀਕ ਹੈ ਸਭ ਕੁਝ ਆਪੇ ਆਪ ਇਹਦੇ ਵਸ ਵਿੱਚ ਸਭ ਕੁਝ ਹੈ ਕਰਨਾ ਛਿਟਕਾਰਾ ਵੀ ਇਹਦੇ ਵਸ ਵਿੱਚ ਹੈ ਹਾਂ ਹਾਂ ਜਾਂ ਗੁਰਬਾਣੀ ਸੁਣਨੀ ਤੁਪ ਜਾਣਾ ਕਰਨਾ ਜੀਵ ਦੇ ਠੀਕ ਹੈ ਜੀ ਅਵਰ ਦੂਜੀ ਜਾਈ ਕਰਕੇ ਹੋਰ ਕੋਈ ਦੂਜੀ ਜਗ੍ਹਾ ਨਹੀਂ ਪੂਰੇ ਪ੍ਰਦੇਸ਼ ਤੋਂ ਬਿਨਾਂ ਕੋਈ ਦੂਜੀ ਜਗ੍ਹਾ ਨਹੀਂ ਠੀਕ ਹੈ ਜੀ ਪੌੜੀ तेरी ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰ ਨਾ ਕੋਈ ਤੁਧ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਕੀ ਹੈ ਤੁਧ ਜੇਵੜ ਤੂੰ ਹੈ ਹੋਈ ਤੇਰੀ ਵਡਿਆਈ ਤੂੰ ਹੈ ਜਾਣਦਾ ਇਹ ਪਰਮੇਸ਼ਰ ਨੂੰ ਕੇ ਪਰਮੇਸ਼ਰ ਤੇਰੀ ਵਡਿਆਈ ਤੂੰ ਕੱਢਾ ਵਡਨ ਕਿੰਨੀਆਂ ਤੇਰੇ ਸ਼ਕਤੀਆਂ ਅਦੁੱਤੇ ਤੁਰ ਅਵਰ ਨਾ ਕੋਈ ਆ ਤੋ ਜੇਵੜ ਅਵਰ ਨਾ ਕੋਈ ਹਾਂਜੀ ਤੁਧੂ ਜੇਵੜ ਹੋਰ ਸਦੀ ਗੋਵੇ ਤਾਂ ਆਖੀ ਐ ਤੁਧ ਜੇਵੜ ਤੂੰ ਐ ਹੋਈ ਤੂੰ ਐਸ ਹੋਈ ਕਿੰਨਾ ਜਿੱਡਾ ਵੱਡਾ ਹੋਰ ਕੋਈ ਸ਼ਰੀਕ ਨਹੀਂ ਹੈ ਡਾ ਵੱਡਾ ਨਾ ਹੈ ਦੀ ਠੀਕ ਤੂੰ ਐ ਹੋਈ ਤੋ ਸਦੀ ਜਦੋਂ ਆਪਾਂ ਕਹਿੰਦੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਉੱਥੇ ਕੀ ਬਾ ਬਣਦਾ ਫਿਰ ਉਹ ਜਿਹੜਾ ਹੈਗਾ ਉਹ ਤਾਂ ਹੁਕਮ ਹੈ ਅੱਛਾ ਜੀ ਜੇ ਕੋਈ ਦੁਨੀਆਂ ਦੇ ਵੀ ਉੱਚਾ ਆਪਣੇ ਆਪ ਨੂੰ ਕਹੌਂਦਾ ਉਹਦੇ ਵੀ ਉੱਚਾ ਨਾਉ ਹੁੰਦਾ ਅੱਛਾ ਜੀ ਜੇ ਕੋਈ ਦੁਨੀਆਂ ਦੀ ਕਹੌਂਦਾ ਉੱਚਾ ਆਪਣੇ ਆਪ ਨੂੰ ਤਾਂ ਉਹਦੇ ਨਾਮ ਉੱਚਾ ਨਾਉ ਹੁੰਦਾ ਉਦੋਂ ਜਦੋਂ ਉੱਚੀ ਸ਼ਕਤੀ ਉਹ ਰੋਗ ਆਕਰੋ ਪਾਵਰ ਉਹਦੋਂ ਉੱਚੀ ਉਹਦੇ ਗੁਣ ਉਹਦੇ ਉੱਚੇ ਅੱਛਾ ਜੀ ਠੀਕ ਹੈ ਸੇਵਿਆ ਤੈਨੂੰ ਸੁਖ ਪਾਇਆ ਹੋਰ ਕਿਸ ਦੀ ਰੀਸ ਕਰੇ ਚਾ ਕੋਈ ਜੇਨ ਸੇਵਿਆ ਤੈਨੂੰ ਸੁਖ ਪਾਇਆ ਕਿਸ ਦੀ ਰੀਸ ਕਰੇ ਚਾ ਕੋਈ ਉਹਦੀ ਰੀਸ ਹੋਰ ਕੌਣ ਕਰ ਸਕਦਾ ਇਹਨਾਂ ਤਰ੍ਹਾਂ ਸੇਵ ਲਿਆ ਉਹਨੂੰ ਸੁੱਖ ਮਿਲ ਗਿਆ ਪਰ ਉਹ ਹੈ ਜੀ ਹੋਰ ਉਹ ਵੀ ਰੀਫਲ ਕਰ ਸਕਦਾ ਕੋਈ ਸੇਵਾ ਕਰਕੇ ਸੁੱਖ ਮਿਲਣਾ ਠੀਕ ਹੈ ਜੀ বিনা ਉਹ ਕਰ ਲਵੇ ਸੇਵਾ ਜੇ ਉਹ ਦਾਤਾਰ ਹਰ ਤੁਧ ਆਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਨੂੰ ਪਜਾਣ ਦਾ ਸਮਰੱਥ ਬੰਨਾ ਕਰਨ ਦਾ ਸਮਰੱਥ ਅਸਰੀ ਨੂੰ ਬੰਨਣ ਕਰਨ ਦਾ ਸਮਰੱਥ ਅੱਛਾ ਦਾਤਾਰ ਹੈ ਦਾਤਾਂ ਵਿੱਚ ਦੂਰ ਹਨ ਹਰ ਹੱਥ ਜੋੜ ਖਲੀ ਸਭ ਕੋਈ ਤੇਰੇ ਤੇ ਸਾਰੇ ਹੱਥ ਜੋੜ ਕੇ ਖੜੇ ਨੇ ਪਾਵੇ ਪਰਮੇ ਪਾਵੇ ਬਿਸ਼ਰੂ ਦੇ ਪਾਵੇ ਹੈ ਪਾਵੇ ਕੋਈ ਰਾਮ ਹੈ ਪਾਵੇ ਕੋਈ ਰਹੀਬ ਤੇਰੇ ਅੱਗੇ ਸਾਰਿਆਂ ਨੇ ਹੱਥ ਜੋੜੇ ਨੇ ਇਹ ਗੱਲ ਸੱਚ ਹੈ ਤੁਹ ਜੇਵੜ ਦਾਤਾਰ ਮੈਂ ਕੋਈ ਨਜ਼ਰ ਨਾ ਆਵਈ ਤੂੰ ਸਭ ਤੋਂ ਦਾਨ ਦਿੱਤਾ ਢੰਡੀ ਵਰ ਢੰਡੀ ਪੁਰੀ ਸਭ ਲੋਈ ਉਸ ਜੇਵੜ ਦਾਤਾਰ ਬੇ ਕੋਈ ਨਜ਼ਰ ਨਾ ਆਵੇ ਆਵਈ ਹਾਂਜੀ ਆਵਈ ਇਹਦੇ ਜਿੰਨਾ ਵੱਡਾ ਦਾਤਾ ਆ ਸਾਰਾ ਸਾਰੂ ਦਾਨ ਦਿੱਤਾ ਜਿੱਥੇ ਜਿੱਥੇ ਦਿੱਤਾ ਖੱਡੀ ਖੰਡੀ ਤੇ ਚੱਤਰ ਬੋਦੂ ਇਹ ਖੰਡ ਨੇ ਖੰਡੀ ਨਾਲ ਚੱਤਰ ਬੋਦੂ ਠੀਕ ਹੈ ਜੀ ਦੋਨੋਂ ਪੇੜ ਪੌਦੇ ਪੈਂਦਾ ਹੌ ਲੱਗਦੇ ਨੇ ਇਹ ਪਾਤਾਲ ਨੇ ਪਾਤਾਲਾਂ ਦੇ ਵਿੱਚ ਵੀ ਜੀਬੀ ਨੇ ਖੰਡੀਆਂ ਲੱਭ ਖੰਡੀ ਇਹ ਤੋਂ ਬਿਨਾਂ ਨੇ ਅੱਛਾ ਜੀ ਕਿਰਤਾਂ ਬਿਨਾਂ ਸਰੀਰ ਤੇ ਹੁਣ ਉਹਨਾਂ ਨੂੰ ਕੀ ਦਾਨ ਦਿੱਤਾ ਸਵਾਲ ਹੈ ਉਹਨਾਂ ਨੇ ਦਿੱਤਾ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇ ਹੀ ਪਾਈ ਉਹਨਾਂ ਨੂੰ ਮਾਨਸ ਉਹਨਾਂ ਨੂੰ ਦੇ ਦਿੱਤੀ ਹੈ ਗਾਂ ਦੇ ਗਾਂ ਦੇ ਚਾਲਾ ਦੇ ਹੀ ਚਾਲਾ ਦੇ ਉਹਨਾਂ ਦੀ ਕਰਤੀ ਆਈ ਹੋਈ ਹੈ ਉਹਨਾਂ ਨੂੰ ਵੀ ਦੇਹੀਆਂ ਦਿੰਦਾ ਰਹੇ ਇਹ ਦੇਹੀਆਂ ਵਾਲੇ ਨੇ ਉਹਨਾਂ ਦੀਆਂ ਲੋੜਾਂ ਦੇਹੀ ਦੀ ਅਰਗਿਆਨ ਦੀ ਪੂਰੀ ਕਰਦਾ ਰਹੇ ਪਾਤਾਲੀ ਆਕਾਸੀ ਜੀ 20 ਪਾਤਾਲੀ ਸਭ ਉਹਨੂੰ ਪੂਰੀਆਂ ਪਾਤਾਲੀ ਤੋਂ ਕਿਪਾ ਬੰਦਾ ਜੀ ਪਾਤਾਲਨੀ ਪੈਰਾਂ ਦੇ ਥੱਲੇ ਜੋ ਹੈ ਸਮੁੰਦਰ ਚ ਜਿਹੜੇ ਦੇ ਥੱਲੇ ਦੀ ਰਹਿੰਦੇ ਨੇ ਜੀਵ ਡੁੱਬੇ ਹੋਏ ਅੱਛਾ ਜੀ ਹਾਂ ਠੀਕ ਹੈ ਸਾਰੀਆਂ ਪੁਰੀਆਂ ਵਿੱਚ ਇਹ ਜੀ ਪੁਰੀਆਂ ਆ ਸਮੁੰਦਰ ਦੇ ਨਾਲ ਵਿੱਚ ਜਦ ਬਾਹਰ ਕਿਸੇ ਪਲੈਨਟ ਦੇ ਉੱਤੇ ਹੋਰ ਕੋਈ ਜੀਵ ਜੰਤ ਹੋਣ ਅੱਛਾ ਜੀ ਉਹ ਚਰਤੀ ਪਰੇ ਹੋਰ ਹੋਰ ਤੇਸੇ ਭਾਰ ਕਬਨਦੇ ਹੋ ਅੱਛਾ ਤੇ ਲੋਈ ਕੀ ਹੈ ਸਭ ਲੋਈ ਲੋਈ ਲੋਈ ਲੋਗ ਹੈ ਜੋਤ ਹੈ ਠੀਕ ਹੈ ਜੀ ਇੱਥੇ ਤੀਸਰੀ ਫੌਟ ਦੀ ਸਮਾਪਤੀ ਹੈ